ਹਾਂਜੀ ਕੋਰਡੀ ਨੰਬਰ ਛੇ ਜੀ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇਵਿਆ ਪੋਤਾ ਪਰਵਾਨ ਪਰਵਾਨ ਸੋਈ ਟਿੱਕਾ ਕੋਈ ਨਾ ਹੈ ਜਿਹੜਾ ਕਿਦੇ ਠੀਕ ਹੈ ਜੀ ਨਹੀਂ ਹੁਣ ਅਮਰਦਾਸ ਜੀ ਦੀ ਗੱਲ ਉਹ ਬਹਿਣਾ ਓਏ ਓਹੀ ਮਤਲਬ ਉਸ ਤਰੀਕੇ ਨਾਲੇ ਬੈਠਾ ਠੀਕ ਹੈ ਜੀ ਆਹ ਉਹਦੇ ਜਰਾ ਨਹੀਂ ਟਿਕਿਆ ਬੈਠਾ ਠੀਕ ਹੈ ਜੀ ਆਹ ਵੀ ਪ੍ਰਿਆਰ ਟਿਕਿਆ ਵੀ ਉਹ ਜਿਹੜਾ ਅੱਛਾ ਜੀ ਸੋਈ ਦੀ ਬਾਣ ਦੀਬਾ ਜਿਹੜਾ ਹੈ ਉਹ ਤਾਂ ਦੀਬਾਨ ਜਿਹੜਾ ਹੈ ਇਹਦਾ ਕੀ ਅਰਥ ਲਵਾਂਗੇ ਜੀ ਇੱਥੇ ਵੀ ਬਾਣੀ ਹੈ ਜੋ ਉਹਨਾਂ ਦਾ ਤੇ ਕੋਈ ਐ ਕੋਈ ਐ ਭਾਏ ਤੇ ਜਿੱਥੇ ਆਪਾਂ ਅੱਜ ਆਪੀ ਸਰ ਜੀ ਕਹਿੰਨੇ ਇਕ ਲਾਇ ਦੀਬਾਨ ਉੱਥੇ ਉਹਦਾ ਅਰਥ ਫਿਰ ਅਲੱਗ ਗਿਆ ਉਹ ਅੱਛਾ ਠੀਕ ਹੈ ਜੀ ਅਰਥ ਸੁਭਾਜ ਆ ਜਾਂਦੀ ਹੈ ਗੱਲ ਅੱਛਾ ਠੀਕ ਹੈ ਜੀ ਉਹ ਹੀ ਟਿਕਾ ਹੈਗਾ ਉਹੀ ਕੋਈ ਸ਼ਾਂਤ ਵਹੀਂ ਤੇ ਕਿਆ ਹੋਇਆ ਮੰਨ ਹੈਗਾ ਤੇ ਉਹੀ ਆਦਤ ਠੀਕ ਹੈ ਜੀ ਪਿਓ ਦਾਦੇ ਜੇਵੇਂ ਆ ਦਾਦੇ ਜੇਵੇਂ ਆ ਪੋਤਾ ਪ੍ਰਵਾਨ ਪਿਓ ਕੌਣ ਪਿਓ ਰਾਜੇਤ ਅੱਛਾ ਦਾਦਾ ਇਹਦਾ ਸ਼ਬਦ ਜਦ ਦੋਹਾ ਵਰਗਾ ਹੋ ਗਿਆ ਜੋਤੀ ਜੋਤ ਮੜੀ ਹੈ ਸੁੱਤ ਸ਼ੌ ਚੜਲੀ ਆ ਪੋਤਾ ਹੋਇਆ ਅੱਛਾ ਜੀ ਤਾਂ ਮਨ ਪ੍ਰਵਾਣ ਹੋਇਆ ਇਹ ਕੋਈ ਗੱਲ ਨਹੀਂ ਹੈ ਕਿ ਕਿਉਂਕਿ ਤੀਸਰੇ ਪਾਸ਼ਾ ਸ਼ੱਕ ਪੈਂਦਾ ਹੈ ਬਹੁਤ ਬੜੀ ਟੀਕਾਕਾਰਾਂ ਨੂੰ ਕਿ ਸ਼ਾਇਦ ਗੁਰ ਅੰਗਦ ਨੂੰ ਪਿਉ ਕਿਹਾ ਤੇ ਨਾਨਕ ਨੂੰ ਦਾਦਾ ਕਿਹਾ ਹੋਇਆ ਇਸ ਤਰ੍ਹਾਂ ਨਹੀਂ ਕੋਈ ਗੱਲ ਨਹੀਂ ਭਾਈ ਹੁੰਦੇ ਆਪਣੇ ਆਪ ਨੂੰ ਠੀਕ ਹੈ ਉਹਦਾ ਹਾਂਜੀ ਜੋ ਬਰਬੀਰ ਤੇ ਪਿਉ ਜਿਹੜਾ ਹੈਗਾ ਇਹ ਹੋ ਗਿਆ ਦਾਦਾ ਜਿਹੜਾ ਸ਼ਬਦ ਤੇ ਪੁੱਤ ਹਾਂਜੀ ਪਿਉ ਦਾਦੇ ਜਿਹ ਹੈ ਪਿਉ ਜਿਹ ਦਾਦੇ ਜਿਹ ਹੈ ਹਾਂਜੀ ਇੱਕੋ ਇੱਕੋ ਲਾਈਨ ਜਾਂਦੇ ਹਾਂਜੀ ਜੇ ਪਿਉ ਜਿਆ ਹੈ ਪਿਉ ਦਾਦੇ ਜਿਆ ਹੈ ਇਹ ਵੀ ਦਾਦੇ ਜੇ ਹੀ ਹੋਇਆ ਫਿਰ ਕੀ ਫਰਕ ਪੈ ਗਿਆ ਹਾਂਜੀ ਕੁਰੂ ਬਰਤੰਦੇ ਠੀਕ ਹੈ ਜੀ ਉਹ ਤਰ ਹੋ ਗਿਆ ਜੀ ਮਾਨ ਪਰਵਾਨ ਇਹ ਘੋਟਾ ਸੀ ਇਹਦੇ ਪਰਵਾਨ ਹੋਣ ਸੀ ਜੀ ਖਰਾ ਖਰਾ ਖਰਾ ਖਰਾ ਖਰਾ ਖਰਾ ਸਭ ਕੋਈ ਖਰਾ ਰਸਲ ਜੁਗ ਜਾ ਹੋਏ ਅਸ ਜਿੰਨ ਬਾਸ਼ਿਕ ਨੇਤਰ ਕੱਤਿਆ ਕਰਨੇ ਹੀ ਤਾਨ ਹਾਂਜੀ ਉਹ ਲੈਤਰੀ ਬਣਾ ਕੇ ਕੱਟਿਆ ਹੋਇਆ ਹੈ ਸ਼ਬਦ ਵਿਚਾਰ ਦੇ ਵਿੱਚ ਠੀਕ ਹੈ ਜੀ ਉਹੜਾ ਕਾ ਨਹੀਂ ਬਣਦਾ ਅੱਛਾ ਜੀ ਉਹ ਬਣਨ ਕਰਦਾ ਸੋ ਸ਼ਬਦ ਕੱਟਿਆ ਦਾ ਕੀ ਮਤਲਬ ਹੈ ਤਰੁੰਦਾ ਪੜਨ ਅੱਛਾ ਜੀ ਪੜਾ ਉਹਤੇ ਉਹ ਡਿਊਟੀ ਤੇ ਲਾ ਦੇਣਾ ਅੱਛਾ ਡਿਊਟੀ ਤੇ ਲੱਗਿਆ ਉਥੇ ਲੱਗ ਕੀ ਆ ਜਿਉ ਲਾਇਆ ਤੇ ਹੋਈ ਲੱਗ ਗਿਆ ਕਰ ਨਹੀਂ ਤਾਣ ਨਹੀਂ ਦਾ ਮਤਲਬ ਕੀ ਹੈ ਜੀ ਜੇ ਇਹ ਉਹ ਨਾਲ ਜਣਾ ਪ੍ਰੇਮ ਨਾਲ ਅੱਛਾ ਖੇਤਾਇਆ ਨਹੀਂ ਲੱਗਿਆ ਬਾਦ ਅੱਛਾ ਜੋਗੀ ਦਾ ਬੋਲ ਲੱਗਦਾ ਪੂਰੀ ਸ਼ਕਤੀ ਲਾ ਰਿਹਾ ਆਪਣੀ ਔਰ ਪ੍ਰੇਮ ਨਾਲ ਆ ਰਿਹਾ ਕੰਮ ਕਰ ਰਿਹਾ ਬੱਚਿਆਂ ਨਾਲ ਬੰਦ ਕਰ ਰਿਹਾ ਪੂਰੇ ਜੋਰ ਨਾਲ ਕਰ ਰਿਹਾ ਆਪਣੇ ਜੋਰ ਤੋਂ ਜਿੰਨਾ ਪੂਰੇ ਦਾ ਪੂਰਾ ਲਾ ਰਿਹਾ ਪ੍ਰੇਮ ਪਰ ਇਹ ਸਭੀਂ ਦੇ ਤਾਂ ਨਾਲ ਲੱਗਿਆ ਹੋਇਆ ਹੈ ਜੀ ਹਾਂ ਜੇ ਲੋਹੇ ਦਾ ਪੂਰਾ ਲਾ ਰਿਹਾ ਹੈ ਅੱਛਾ ਜੀ ਚੰਗੋ ਵਿਚਾਰ ਵਿੱਚ ਠੀਕ ਹੈ ਪਰ ਇਹ ਘੇਰ ਜੋ ਕਰੇ ਜਿਹੜਾ ਫਿਰ ਵੱੱਦਾ ਛੱਟੀ ਨਾ ਗੁਣ ਨਾ ਉਪਕਾਰ ਉਹ ਜੋਗੀ ਦਾ ਫਿਰ ਉੱਥੇ ਲਾਇਆ ਹੈ ਠੀਕ ਹੈ ਜੀ ਅੱਛਾ ਜੀ ਜੋਗੀ ਦੇ ਉਹ ਹੀ ਆਇਆ ਕਿਵੇਂ ਕਰਦਾ ਜਿੰਨ ਸਮੁੰਦ ਵਿਰੋਲਿਆ ਕਰ ਮੇਰ ਮਧਾਨ ਉਦੜ ਬਰੋਲਿਆ ਇਹ ਮਨ ਸਮੁੰਦਰ ਬੁੱਧੀ ਨੂੰ ਨਾਲ ਲਾਇਆ ਕਰ ਮੇਰ ਮਧਾਨ ਪਰਮਧਾਨ ਜਿਹੜਾ ਹੈਗਾ ਔਰ ਇਹ ਮੇਰੇ ਦੁਹਾਨ ਤੇ ਔਂਕਰ ਲੱਗਿਆ ਹੋਇਆ ਮੇਰ ਦੁਆਰ ਹੈ ਬੁੱਧੀ ਨਾਲ ਹੈ ਅੱਛਾ ਨਾਲ ਬੁੱਧੀ ਹੈ ਅੱਛਾ ਜੀ ਉਹ ਨਹੀਂ ਦਵਾ ਸਾਰੇ ਲੱਗੇ ਦੇਖੋ ਅੱਛਾ ਚੱਕੋ ਪਾਸੇ ਠੀਕ ਹੈ ਜੀ ਹੋਈ ਜਿਵੇਂ ਜੋਦੀ ਹੈ ਜੀ ਠੀਕ ਹੈ ਜੀ ਹਾਂ 14 ਰਤਨ ਨਿਕਾਲੀਆਂ ਕੀ ਤੋਨ ਚਾਨਾਂਣ ਹਰੀ ਦੁਨੀਆ ਦਾ ਜਿਹੜਾ ਹੈ ਨਾ ਲੋਕ ਦਾ ਲਿਆ ਠੀਕ ਹੈ ਜੀ ਹਾਂਜੀ 14 ਰਤਨ ਲਿਆ ਤੇ ਲੋਗ ਦਾ ਗਿਆਨ ਠੀਕ ਹੈ। ਤੁਹ ਵੀ ਲੈ ਜਾਣ ਦਾ ਮਤਲਬ ਕੀ ਹੈ ਤੇ ਲਿਖਿਆ ਵੀ 14 ਰਤਨ ਨਿਕਾਲੀਆਂ। ਇਹ ਕਿਥੋਂ ਨਿਕਲੇ? ਅੱਛਾ ਜੀ। ਅਸੀਂ ਦੇ 10 ਵਜੇ ਦਿੱਤਾ। ਠੀਕ ਹੈ ਜੀ। ਅੰਦੂ ਲਿਆ ਬਾਹਰ ਜੇ ਮੱਖਣ ਕੱਢ ਲਈਏ ਕਿ ਕੇ। ਹਾਂਜੀ। ਖੱਜ ਬਾਹਰ ਕੱਢ ਸੰਸਾਰ ਦਾ ਠੀਕ ਹੈ ਜੀ ਸੰਸਾਰ ਦਾ ਖੱਜ ਬਾਹਰ ਕੱਢ ਕੇ ਚਲਣ ਕਰਤਾ ਠੀਕ ਹੈ ਜੀ ਸੰਸਾਰ ਥੱਕ ਗਿਆ ਸੰਸਾਰ ਝੂੜ ਗਿਆ ਬ੍ਰਹਮ ਅੱਡ ਦਰਸ਼ਨ ਕਰਾਤਾ ਵਾਇਆ ਅੱਡ ਦਰਸ਼ਨ ਕਰਾਤਾ ਵਾਇਆ ਦਾ ਗਿਆਨ ਵੱਖਰਾ ਕਰਕੇ ਦੱਸਤਾ ਜਿਹੜਾ ਕਰਦਾ ਗਿਆਨ ਵੱਖਰਾ ਕਰਕੇ ਦੱਸਤਾ ਦੋਹੇ ਗਿਆਨ ਵੱਖਰੇ ਵੱਖਰੇ ਕਰਦੇ ठीक है घोड़ा की तो सहजदा जत की ओ फलाण सहजदा घोड़ा सहज कायदे पावड़े से बचा है काय व्यवस्था है हां जी सहज हो गया बंद सहज हो गया बंदा घोड़ा है और घोड़ा हो गया जी ना? जत की ओ फलाण ਪਲਾਨ ਮਨ ਕਾਠੀ ਪਲਾਨ ਮੁੱਕ ਤੇ ਬਾਹਰ ਜਾਓ ਅੱਛਾ ਕਾਠੀ ਜਿਹਨੂੰ ਆ ਘੋੜਾ ਕੀ ਤੋ ਸਹਜ ਦਾ ਜਤ ਕੀ ਉਹ ਪਲਾਨ ਜਤ ਦਾ ਮਤਲਬ ਯਤਨ ਦਾ ਮਤਲਬ ਠੀਕ ਹੈ ਜਤ ਅੱਛਾ ਜੀ ਯਤਨ ਕੇ ਉਹ ਕਾਇਰ ਕਿਵੇਂ ਇੱਜਾ ਤਾ ਚਾਬਕ ਬਗਰੂ ਹਾਂਜੀ ਫਿਰ ਬਗਰੂ ਕਿੱਥੇ ਆਪਕ ਬਗਰੂ ਇਹ ਤਾਂ ਅਪ੍ਰੈਲ ਬਗਰੂ ਕਿੱਥੇ ਆਪਕ ਠੀਕ ਹੈ ਫਿਰ ਘੋੜਾ ਨਾ ਦੰਤ ਮਨ ਨੂੰ ਘੋੜਾ ਜੀ ਘੋੜਾ ਅੱਛਾ ਜੀ ਹੋ ਠੀਕ ਹੈ ਸਹਜ ਦਾ ਮਤਲਬ ਗਿਆਨ ਹੁੰਦਾ ਜੀ ਗਿਆਨ ਹੁੰਦਾ ਗਿਆਨ ਹੁੰਦਾ ਵਸਤਾ ਅੱਛਾ ਜੀ ਧਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਹੱਥ ਦਾ ਦਰ ਕਿਹੜਾ ਜਸਾ ਬੰਦ ਹਾਂ ਜਿਹੜਾ ਹੈ ਸਤ ਹਾਂਜੀ ਉਹ ਹੈ ਠੀਕ ਹੈ ਜੀ ਪੱਕਾ ਜਾ ਸਕਦਾ ਹੈ ਜਾਂ ਝੂਠਾ ਦੀਏ ਠੀਕ ਹੈ ਜੀ ਕਿਤੇ ਕਬੂਦਾਂ ਵੀ ਘੁੰਮਣ ਸੀ ਤ੍ਰਿਸ਼ਰੂ ਦੇ ਟੀਰ ਸੀ ਤ੍ਰਿਸ਼ਰੂ ਦੇ ਟੀਰ ਚੱਲਦੇ ਜੀ ਤੇ ਫਾਜ਼ੀ ਦਾ ਕਬੂਦ ਫਾਜ਼ੀ ਦਾ ਤਾਪੀ ਹੈ ਤੇ ਕੌਂਦਰ ਘੁੰਮਣ ਸੀ ਆਇਆ ਦੀ ਕੌਂਦਰ ਹੁੰਦੀ ਹੈ ਕੌਂਦਰ ਹੁੰਦੀ ਹੈ ਆਇਆ ਦੀ ਅੰਗਾਰ ਕੋਮਲ ਦਾ ਫਰਕ ਹੈ ਅੱਛਾ ਤੇ ਕੋਮਲ ਕੋਮਲ ਚ ਗਵਾਨ ਚਾਈ ਲੱਗਦਾ ਕਿ ਵੀ ਅੱਛਾ ਜੀ ਆ ਆ ਦੀ ਗਵਾਨ ਹੁੰਦੀ ਹੈ ਤੁਹਾਨੂੰ ਜਿਹੜੀ ਨੇ ਤੇ ਹੁੰਦਾ ਅੱਛਾ ਜੀ ਜਸ ਹੁੰਦਾ ਬਾਣੀ ਦੇ ਬਾਣੀ ਹੁੰਦੀ ਹੈ ਤੇ ਹੰਦਾ ਕੀ ਹੁੰਦਾ ਹੰਦਾ ਕੀ ਜਨੇ ਜਸ ਕਲਰੀ ਵਾਲ ਹੈ ਜਸ ਹੰਦਾ ਕੀ ਹੁੰਦਾ ਹੰਦਾ ਬਾਣ ਜਸ ਆਵਲ ਤਾਂ ਤਾਂ ਕਹਿੰਦੇ ਹੰਦਾ ਉਧਰ ਬੋਲਦੇ ਨੇ ਇਧਰ ਆਪਣੇ ਕਲਕੱਤੇ ਵਾਲ ਅੱਛਾ है ਹੰਦਾ ਕੱਲ ਵਿੱਚ ਤੂੰ ਅੰਧਾਰ ਸਾਹ ਕਲਪਨਾ ਉਹ ਬੇਚੇ ਦੇ ਬਿਲਕੁਲ ਅਗਲਤਾ ਹੁੰਦੀ ਠੀਕ ਹੈ ਜੀ ਉਹ ਗੈਨ ਨਹੀਂ ਹਿਲਦੇ ਆਦੂ ਗੈਨ ਨਹੀਂ ਹਿਲਦੇ ਆਦੂ ਜੇ ਰੋਲ ਵਾਸਤੇ ਕੰਮ ਹੋ ਗਿਆ ਠੀਕ ਕਰ ਰਿਹਾ ਜਿਹੜੇ ਕਲਪਨਾ ਕਰਦੇ ਮਾਇਆ ਦੀ ਇਹ ਤੇ ਕੱਲ ਜੂਗਾ ਦਿਲ ਕਰਨ ਵਾਸਤੇ ਠੀਕ ਹੈ ਜੀ ਕੱਲ ਵੀ ਸੂਨ ਅੰਧਾਰਾ ਤਹਾਨੂੰ ਸੂਜੀ ਦੀ ਪਾਣ ਲਿਖਿਆ ਹੈ ਹਾਂਜੀ ਪਾਣ ਨਰਾਕਾਰੀ ਸੂਜੀ ਨੂੰ ਕਹਿੰਦੇ ਨੇ ਅੱਛਾ ਜੀ ਤੇ ਪਾਣ ਲਫ਼ਜ਼ ਦਾ ਅਰਥ ਅਸਲੀ ਜੂ ਸੂਜੀ ਬਣਾ ਲਿਆ ਹੋ ਗਿਆ ਦੰਦਾ ਹੂੰ ਜਿਹੜੇ ਵਰਤੇ ਹੋਏ ਨੇ ਸਰ ਹਾਂਜੀ ਰਸੋਈ ਲੰਗਰ ਦਰभी ਠੀਕ ਹੈ ਜੀ ਸੋ ਬ੍ਰੰਭデア ਦੇ ਵਿੱਚ ਜਿਹੜੀ ਬ੍ਰੰਭデア ਉਹਦੇ ਸ਼ਬਦ ਨੇ ਗੁਰਮੁਖੀ ਭਾਸ਼ਾ ਦੇ ਲਫ਼ਜ਼ ਨੇ ਠੀਕ ਹੈ ਜੀ ਸਤੋਂ ਖੇਤ ਜਮਾਇਓ ਸਤੋਂ ਸ਼ਾਵਾਨ ਸੱਚਾ ਵੀ ਪਾਇਆ ਸੱਚਾ ਦਾ ਮਤਲਬ ਜੰਮਣਾ ਜੀ ਅੱਛਾ ਅੱਛਾ ਜੀ ਠੀਕ ਹੈ। ਤਾਂ ਜਦ ਮੈਂ ਆ ਉਹਦੀ ਛਾਉ ਹੋ ਰਹੀ ਹੈ, ਝਾਵਾਂ ਹੋ ਰਹੀ ਹੋਦੀ। ਠੀਕ ਹੈ ਜੀ। ਉਹਦੀ ਠੀਕ ਹੈ ਜੀ। ਤੇ ਤੇਰੀ ਹੈ ਕਿਉਂ ਮੈਦਾ ਖਾਨ? ਅਦਰ ਆ ਗਿਆ ਹਾਂਜੀ। ਜਿਹੜੀ ਤੇਰੀ ਸੋਈ ਆਦੋ। ਹਾਂਜੀ। ਪਤਾ ਤੇ ਹੋਰ ਮੈਂ ਤਾਂ ਖੂਬ ਨੰਬਰ ਚਲ ਪਰਦਾ ਕੋਈ ਗੱਲ ਨਹੀਂ ਠੀਕ ਹੈ ਜੀ ਕਿਉਂ ਹੋਰ ਪਤਾ ਉੱਥੇ ਹਾਂਜੀ ਉਹ ਤੇਰਾ ਸਭ ਤੋਂ ਕੀਰ ਕਹ ਠੀਕ ਹੈ ਜੀ ਤੇ ਇਹ ਬਾਹਰ ਦੇ ਮਟੀਰੀਅਲ ਆ ਹਾਂ ਰੋਈ ਦੇ ਰਹੀ ਹੈ ਜਰੂਰ ਅੰਦਰ ਕੋਈ ਜਲਾ ਰੋਈ ਤੋਂ ਵੀ ਜਲਾ ਰਹੀ ਹੈ ਫਿਰ ਰੋਈ ਸੰਦਲ ਹੋਰ ਚਲਾ ਰਹੀ ਹੈ ਕੋਈ ਡਿਊਟੀ ਅੱਛਾ ਜੀ ਰੋਈ ਬੰਗੋ ਦੇ ਰਹੀ ਹੈ ਪਰ ਆਪ ਨਹੀਂ ਹੈ ਹੈ ਕਰ ਰਹੇ ਠੀਕ ਹੈ ਜੀ ਗੁਰੂ ਦੇ ਨੇ ਹੈ ਤੇ ਚਾਰੇ ਕੁੰਡਾਂ ਸੁੱਜੀਐਸ ਸੁੱਜੀਐਸ ਮਨਮਹਿ ਸ਼ਬਦ ਪ੍ਰਵਾਨ ਆਹ ਜਦ ਬੁਰੇ ਖਬਰ ਨੂੰ ਬੰਦ ਲਿਆ ਪ੍ਰਵਾਨ ਕਰ ਲਿਆ ਉਸ ਨੂੰ ਪ੍ਰਵਾਨ ਕਰ ਲਿਆ ਚਾਰੇ ਕੁੱਟਾਂ ਦਾ ਗਿਆਨ ਹੋ ਕੀ ਹੁੰਦੀਆਂ ਜੀ ਚਾਰੇ ਕੁੰਡਾਂ ਪੂਰਬ ਚਾਰ ਪਦਾਰਥਾਂ ਦੀ ਗੱਲ ਹੋ ਰਹੀ ਹੈ अच्छा जी तो कल देर हरि का भासा बच्चा अल्लाह बका को पहचाने को थोड़ी सूजी है अच्छा जी तो करण वाले की करते हैं ਜਿਹੜੇ ਜਾਰੇਗੁਰਦਾਂ ਦੇ ਵਿੱਚ ਗਿਆਨ ਲੋਕ ਕਰਦੇ ਸੀ ਉਹਨਾਂ ਦਾ ਪਤਾ ਲੱਗ ਗਿਆ ਵੀ ਉਹ ਵਿਚਾਰੇ ਭੁੱਲਣ ਪੂਰਬ ਦੇ ਲੋਕ ਕੀ ਬੰਦੇ ਨੇ ਪੱਛਮ ਦੇ ਲੋਕ ਕੀ ਬੰਦੇ ਨੇ ਉਹਦੇ ਵਿੱਚ ਬਹੁਤ ਮਹਿਸਾਨ ਨੂੰ ਦੱਸਿਆ ਹੈ ਕਹਾਂ ਉਸਤ ਅੱਛਾ ਜੀ ਤੇ ਇਹ ਗੱਲਾਂ ਇਹ ਤਾਂ ਹੋਇਆ ਵੀ ਮਨ ਵਿੱਚ ਸ਼ਬਦ ਪ੍ਰਵਾਨ ਹੋ ਗਿਆ ਹੈ ਜੀ ਤੇ ਇਹ ਬਾਂਵਜਿਆ ਸ਼ਬਦ ਨੂੰ ਲਿਆ ਸਮਝ ਲਿਆ ਅੱਛਾ ਜੀ ਦੇ ਬਾਅਦ ਸਮਝ ਆਈ ਹੈ ਗਲਤੀ ਮੈਂ ਜੇ ਮੰਨਦਾ ਨੀ ਸਾਰੇ ਕੋਈ ਲੱਗਦੇ ਤੇ ਬੁਰੇ ਪਤਾ ਕਰਿਆ ਤਾਂ ਠੀਕ ਹੈ ਜਿਹੜਾ ਗਲਤ ਹੈ ਹਾਂ ਦੇ ਬਾਅਦ ਕੋਟੇ ਘਰੇ ਦੀ ਪਛਾਣ ਹੁੰਦੀ ਹੈ ਆਵਾ ਗੌਣ ਨਿਵਾਰਿਓ ਕਰ ਨਜ਼ਰ ਨਿਸ਼ਾਨ ਹਮਮ ਬਸ ਸਰਪਾ ਵੀ ਹੋਈ ਕਰ ਪਾਏ ਹੋਈ ਕਰ ਰਿਹਾ ਸ਼ਬਦ ਪ੍ਰਗਟ ਕਰਦਾ ਤਾਉਨੇ ਤਾਂ ਅੱਛਾ ਜੀ ਨਾਮ ਦੇ ਸਾਹਮਣੇ ਹਾਂਜੀ ਅਧਰੈ ਸੋਜੀ ਰਹੀ ਤੇ ਅਧਰੈ ਸ਼ਬਦ ਹਾਂਜੀ ਆਵਾਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਆਵਾਗੌਣ ਖਤਮ ਕਰਤਾ ਕਿਰਪਾ ਹੈ ਨਦਰ ਐਸੀ ਕੀਤੀ ਬਹੁਤ ਜ਼ਿਆਦਾ ਬਹੁਤ ਠੀਕ ਹੈ ਜੀ ਪਰ ਅਪਾ ਪਹਿਲਾਂ ਕਰਦੇ ਸੀ ਡਿਸਕਸ ਕੀ ਆਵਾਗੌਣ ਜੋ ਹੈ ਉਹ ਪੁਲੇਖਾ ਹੈਗਾ ਜੀ ਦਾ ਮਰਦਾਨੀ ਹੈ ਗਿਆਨ ਦੇ ਤਲਵੇ ਠੀਕ ਹੈ ਜੀ ਗਿਆਨ ਦੇ ਠੀਕ ਹੈ ਜੀ अवतरया अवतार लै सो पुरख सुजान अवतरया पढ़ाएंगे जी हां ये इक अक्षर दो अक्षर अवतरया कोई अक्षर है अच्छा जी अवतरया अवतार लै सो पुरख सुजान अवतरया उतर गया अवतार ले जन्म प्रकाश लेके कर ਹਾਂਜੀ ਗਰਾਦਾਰੀ 2 ਕੋਹ 10 ਅਕਤੂਬਰ ਹਾਂਜੀ ਫਿਰ ਤਰ ਗਿਆ ਫਿਰ ਕੀ ਫਿਰ ਤਰਦਾ ਹੀ ਰਹਣਾ ਮੈਂ ਦੇਖ ਲਵਦਾ ਰਿਹਾ ਆਉਤਾਰ ਲੈ ਲਿਖਿਆ ਆਉਤਾਰ ਕੀ ਹੁੰਦਾ ਜੀ ਉਤਾਰੇ ਕੋ ਅੱਛਾ ਉਹ ਲੈ ਜਿਹਨੂੰ ਇਹ ਆਪਣੇ Hindu ਉਤਾਰ ਗਏ ਨੇ ਉਹ ਉਤਾਰ ਹੈ ਇਹ ਉਤਾਰ ਹੈ ਕਿਹੜੀ ਲਫ਼ਜ਼ ਆਖ ਰਹੇ अच्छा जी। इस इस अच्छा जी ਤੇ ਬਿਨਾਂ ਇਸ ਰੀਤ ਤੇ ਬਿਨਾਂ। ਅੱਛਾ ਜੀ। ਪੁਰਾਣੇ ਉਤਾਰ ਦਾ ਬੋਆ ਦੇ। ਠੀਕ ਹੈ ਜੀ। ਜਨਾ ਕੋ ਨਾਲੇ ਵਿੱਚ ਇਹ ਤਿਹ ਹੈ ਤਰੀਆ ਪੰਦਾ ਉਤਾਰ ਹੈ। ਅੱਛਾ ਜੀ। ਤੇ ਤਰੇ ਕੋਣ ਬਿਟੇ ਖਾਈਏ ਸਾਰਾ ਲੈ। ਇਹਨਾਂ ਬੜੇ ਬੜੇ ਪਹਾੜੀ ਲੋਕ ਨੇ ਇਹਨਾਂ ਦੇ ਲੋਕ ਠੀਕ ਹੈ ਜੀ ਦੇ ਦੋਹਾਂ ਦੇ ਠੀਕ ਹੈ ਜੀ ਸਰਕਾਰਾਂ ਵੱਲੋਂ ਹਾਂ ਦੂਜਿਆਂ ਵੱਲੋਂ ਜਿਹੜੇ ਹਮਦਰਦ ਆਏ ਨੇ ਅੱਛਾ ਜੀ ਤੁਸ ਵਸਲੇ ਖੜੇ ਹੁੰਦੇ ਰਹੇ ਨੇ ਬੁਰਾ ਬੁਰਾ ਦਾਦੇ ਖਰਾਬ ਉਹਦੇ ਤੱਤੂ ਦਸੂ ਜੀ ਸੀਗੇ ਹਾਂਜੀ ਸੀ ਹੋਰ ਕੀ ਸੀ ਠੀਕ ਹੈ ਬੁਰਾ ਹੋਰਾਂ ਦੇ ਸਾਹਮਣੇ ਚੱਖਣ ਵੇਰ ਖੜਾ ਬਣ ਸਾਡੇ ਨੂੰ ਦੇ ਸਾਰੇ ਦੀ ਲੋੜ ਨਹੀਂ ਹੈ ਠੀਕ ਹੈ ਜੀ ਚੋਰ ਨੂੰ ਦੇ ਸਾਰੇ ਦੀ ਲੋੜ ਠੀਕ ਹੈ ਸਾਡੇ ਨੂੰ ਵੀ ਸਾਰੇ ਦੀ ਲੋੜ ਹੈ ਮੈਂ ਜੀ ਵੀ ਦੇ ਸਾਰੇ ਦੀ ਲੋੜ ਹੈ ਨੁਸਬਾ ਦੇ ਸਾਰੇ ਦੀ ਲੋੜ ਹੈ ਬਦਵਲੋਂ ਦੇ ਸਾਰੇ ਦੀ ਲੋੜ ਹੈ ਨਾ ਪੈਸੇ ਦੇ ਸਾਰੇ ਦੀ ਲੋੜ ਹੈ ਤੇ ਰੀਸੀ ਦੇ ਸਾਰੇ ਦੀ ਲੋੜ ਹੈ ਸਾਰੇ ਘੁੱਟ ਕਰੇ ਕੋਟੜੇ ਦਾ ਜਾਣੇ ਬਿਰთა ਜੀ ਕੀ ਜਾਣੀ ਹੂੰ ਜਾਣ ਜਾਣਦਾ ਕੋਈ ਜੀਵ ਦਾ ਜੰਤ ਦੀ ਵਰਤ ਸਭ ਦੀ ਜਾਣਦਾ ਹੈ ਸਰੀਰ ਦਾ ਵੀ ਪਤਾ ਅੰਦਰ ਕੀ ਹੋ ਰਿਹਾ ਹੈ ਜਾਣੀ ਉਹ ਜਾਣਦਾ ਦੇ ਵਾਸਤੇ ਹੈ ਗੁਰੂ ਅਮਰਦਾਸ ਵਾਸਤੇ ਚੱਲ ਰਹੀ ਹੈ ਬਿਲਕੁਲ ਬਿਲਕੁਲ ਉਹਦੇ ਵਾਸਤੇ ਜੀ ਨੂੰ ਚਾਹੀਦਾ ਜੀ ਦਾ ਭਲਾ ਕਿਹਣੀ ਚੀਜ਼ ਗੁਰੂ ਕਾਰਜ ਪਵਤਨ ਵਾਲੋ ਜੀ ਨੂੰ ਜੀਵਨ ਜੀਵਨ ਵਾਸਤੇ ਕਲਿਆਣਕਾਰੀ ਹੋਵੇ। ਠੀਕ। ਜੀ ਵਾਸਤੇ ਕਲਿਆਣਕਾਰੀ ਕੀ ਹੁੰਦਾ? ਜੀ ਵਾਸਤੇ ਤਾਂ ਕਲਿਆਣਕਾਰੀ ਗਿਆਨ ਹੀ ਹੈ। ਠੀਕ ਹੈ ਜੀ। ਜੀ ਠੀਕ ਹੈ ਜੀ। ਜੇ ਰੋਈਦਾ ਪਹੁੰਚਦਾ ਤਾਂ ਉਹਦਾ ਟਾਈਮ ਨਹੀਂ ਦਿੱਤਾ ਉਸੇ ਲੱਗਦਾ। ਹਾਂਜੀ। ਬਸ ਨੂੰ ਰਤਨ ਜੀ। ਸਾਲ ਦਾ। ਠੀਕ ਹੈ ਜੀ। ਸੋਣਾ ਬਾਈ ਖਾਜ ਦੇਦੇ ਦੇਦੇ ਫੇਰ ਆਈ ਠੀਕ ਹੈ ਜੀ। ਇਹ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸ਼ੁਗਰ ਸੁ ਜਾਣ ਜਿਹੜੀ ਗਿਆਨਪ੍ਰੀ ਵੈਸਲਾ ਸੁਖ ਸੁਵਾਕੀ ਕਰ ਤੀ ਜੇ ਲੁਗੜਿਆ ਪਰਵੇਸ਼ ਨੇ ਆਪ ਹੈ ਤੂੰ ਘੜ ਬਹੁਤ ਹੀ ਉਂਦਾ ਘੜਿਆ ਹੈ ਤੇਰੀ ਸਭ ਤੋਂ ਵੱਧ ਉਹਨੇ ਆਪ ਘੜੀ ਹੈ ਜਦ ਦੱਸਦੇ ਹਾਂ ਰਾਂ ਠੀਕ ਹੈ ਜੀ ਜੋ ਤੂੰ ਹੈ ਜੋ ਤੂੰ ਹੈ ਉਹ ਦੱਸਿਆ ਸਿਰਫ ਸੁਣਾ ਦਿੱਤੀ ਦਾਨ ਜੇ ਠੀਕ ਹੈ ਜੀ ਹਾਂ ਦਾਨ ਜੇ ਸਤਗੁਰ ਭਾਗ ਸੀ ਸਸਤੇ ਦਾਨ ਮੈਨੂੰ ਇਹ ਦੇਣਾ ਉਹ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਮੈਂ ਕਹ ਰਹੀ ਮੰਗ ਲਓ ਨਾਲ ਕੋਈ ਇਹਦੇ ਵਿੱਚ ਵੀ ਫੇਰ ਹੈ ਤੇ দান ਜੀ ਸਤਗੁਰੂ ਭਾਪ ਸੀ ਸੱਤੇ দান ਉਹ ਨਾਣੇ ਨਾਲ ਲਿਖਿਆ ਜੀ ਚਲੋ ਤੇ ਸੱਤਾ ਜੀ ਕਹਿ ਰਹੇ ਆ ਵੀ ਮੈਨੂੰ ਉਹੀ ਦਾਨ ਦੋ ਜੋ ਤੁਹਾਨੂੰ ਪਉਂਦਾ ਹਾਂ ਹਾਂ ਠੀਕ ਹੈ ਜੋ ਤੁਹਾਨੂੰ ਪਉਂਦਾ ਆਹ ਕੋਈ ਨਹੀਂ ਜੇ ਤੂੰ ਮੈਨੂੰ ਦਵਾਈ ਦੇਣੀ ਆ ਬਰੀ ਜੀ ਨੂੰ ਕੀ ਪਤਾ ਦਵਾਈ ਕਿਹੜੀ ਦੇਣੀ ਡਾਕਟਰ ਨੂੰ ਪਤਾ ਹੈ ਠੀਕ ਹੈ ਜੀ ਇਹ ਹੋਏ ਤੈਨੂੰ ਜਕੀ ਲੱਗਦੀ ਰੋਗ ਚਾਹੀਦਾ ਠੀਕ ਹੈ ਜੀ ਤੇ ਨਾਨਕ ਹੰਦਾ ਛੱਤਰ ਸਿਰ ਉਮਤ ਹੈਰਾਨ ਸਰਤੇ 76 ਦਾ ਟੈਲੋ ਨਿਕਲੇ ਹਾਂਜੀ ਤੇ ਸਰਤੇ ਨੰਬਰ ਆ ਪਈ ਹੈ ਠੀਕ ਹੈ ਜੀ ਸਰਤੇ ਸਰਤੇ 63 ਹੈਗਾ ਹੈ ਇਸ ਵਕਤ ਹੁੰਦਾ ਜੋ ਹੈ ਹਾਂਜੀ ਹੰਦਾ ਵੀ ਜੋ ਨਾਨਕ ਦੇ ਸਿਰ ਪਰ ਸੀ ਉਹੀ ਛੱਤਰ ਹੋਣ ਗੁਰੂ ਰਾਮ ਅੰਮ੍ਰਿਤਦਾਸ ਜੀ ਦੇ ਸਿਰ ਤੇ ਤੇ ਨਾਨਕਾ ਆਪ ਹੀ ਲੈ ਲ ਗਏ ਠੀਕ ਹੈ ਇਹਨੂੰ ਥੋੜੀ ਅੰਮ੍ਰਿਤਦਾਸ ਜੀ ਦੇ ਹੈ ਦੱਸੋ ਜੋ ਨਾਨਕ ਦੇ ਸਿਰ ਤੇ ਛੱਤਰ ਸੀ ਠੀਕ ਹੈ ਜੀ ਅਸੀਂ ਨਾਲ ਕੇ ਜਦ ਰੋਹੀ ਹੈ ਠੀਕ ਹੈ ਜੀ ਸੋ ਟਿਕਾ ਸੋ ਬਹਿਣਾ ਦੀ ਬਾਣ ਪੋਤਰਾ ਪ੍ਰਵਾਨ ਇੱਥੇ ਪੈਰ ਚ ਰਾਰਾ ਲਾਤਾ ਅੱਧਾ ਪਿੱਛੇ ਪੋਤਾ ਹੀ ਸੀਗਾ ਪੋਤਰਾ ਪ੍ਰਵਾਨ ਆਹ ਪੋਤਰਾ ਪੋਤਰਾ अच्छा जी। ओ ताला जानतब। ओ ते जानोले पकए। हां जी। ओ ताला हु। ठीक है पोचा जी नु। हां पोचा कने दे ओ ते पो तेरा अली पोचा श्री जी